दोहरा एक राव की पुत्र का अटपल देवी नाम व्याही एक नरेश को जाते पूतना धाम चौबई राजा जतन करत पयो पूतना धाम विधाता दयो तर्नो अवस्थ है बितायो बिरधापनो अंत गति आयो तब तरणी रानी सो पई जब जवानी राजा की गई ता सो करी जाते अति अवला जी जरी दोहरा ਇਕ ਪੁਰਖ ਸੋ ਦੋਸਤੀ ਰਾਣੀ ਕਰੀ ਬਨਾਏ ਕਾਮ ਭੋਗ ਤਾ ਸੋ ਕਰੈ ਨਿਤ ਪ੍ਰਧ ਧਾਮ ਬੁਲਾਏ ਚਾਉ ਬਈ ਤਾ ਕੋ ਧਰਮ ਪ੍ਰਾਥ ਥਾਰਾਯੋ ਸਭ ਜਗ ਮਹਿ ਇਹ ਭਾਂਤ ਊਡਾਯੋ ਭਾਏ ਭਾਏ ਕਹਿ ਰੋਜ ਬੁਲਾਵੈ ਕਾਮ ਕੇਲ ਰੁਤਿਮਾਨ ਕਮਾਵੈ ਜੋ ਜਾਤੇ ਮੋਕੋ ਸੁਤ ਹੋਈ ਨਿਰਪਕੋ ਪੂਤ ਲਖੈ ਸਭ ਕੋਈ ਦੇਸ ਵਸੈ ਸਭ ਲੋਗ ਰਹੈ ਸੁਖ અમરો મિટા ચિત્ત ਸਬ સબ દુખ અડેલ પાંદ પાંદ કે ભોકર તાસો ભઈ નિરપ કી બાદ વિચાર સબ હે ચિત્તે દઈ લવડ લવડ ગઈ નયન નયન મિલાય કૈ હો ફસ્ત હિરન દયો હિરન બિલוק બનાય કૈ ઇતક દિન રાજાજી દિવકે લોગ ગય નશત રાજ લાખ લોગ અત્યાકુલ હોત પે તબ રાણી મિતવા કો લે ઉબલાય કૈ હો દયો રાજા કો સાજ સો છત્ર ફરાય કૈ ચોબી ਬੂਤਨਾ ਤਾਮ ਹਮਾਰੇ ਪੈ ਰਾਜਾ ਦੇਵ ਲੋਕ ਕੋ ਗਏ ਰਾਜ ਇਹ ਪ੍ਰਾਤ ਹਮਾਰੋ ਕਰੋ ਆਕੇ ਸੀਸ ਛਤਰ ਮੇਰੋ ਪ੍ਰਾਧ ਰਾਜ ਕਰੋ ਉਤਰ ਪਤਰ ਆਕੇ ਸਿਰ ਢਰੋ ਸੂਰ ਆਗਿਆ ਸਭ ਕਹਿ ਜਾਂ ਪਠਈਏ ਤੇ ਜੈ ਹੈ ਦੋ ਰਾਮ ਰਾਣੀ ਐਸੋ ਬਚਨ ਕਹਿ ਦਇਓ ਜਾਰ ਕੋ ਰਾਜ ਮਿਤਬਾ ਕੋ ਰਾਜਾ ਕੀਆ ਫੇਰ ਛਤਰ ਦੈ ਸਾਜ ਚਉਪਈ ਸੂਰਬੀਰ ਸਾਹ ਭਾਇ ਲਗਾਏ گاਉਂ گاਉਂ ਚੌਧਰੀ ਬੁਲਾਏ ਦਇਆ ਸਿਰ ਪਾਓ ਵਿਦਾ ਕਰ ਦੀਨੇ ਆਪਨ ਭੋਗ ਯਾਰ ਸੋ ਕੀਨੇ ਮੇਰੋ ਰਾਜ ਸੁਖਲ ਸਭ ਭਇਓ ਸਭ ਧਨ ਰਾਜ ਮਿੱਤਰ ਕੋ ਦਇਓ ਮਿੱਤਰ ਅਰਮੋ ਮੈਂ ਭੇਦ ਨਾ ਹੋਈ ਬਾਲ ਬਿਰਧ ਜਾਨਤ ਸਭ ਕੋਈ ਸકલ ਪ੍ਰਜਾਏ ਭਾਂ ਤੂ ਚਾਰੈ ਬੈਠ ਸਦਨ ਮੈਂ ਮੰਤਰ ਵਿਚਾਰੈ ਨਸ਼ ਰਾਜ ਰਾਣੀ ਲਖ ਲੈਓ ਤਾਤੇ ਰਾਜ ਭਰਾਤ ਕੋ ਦਇਓ ਦੋਹਰਾ akeel kart riji adak heer tarun tarunang raj saaj taate dayo eh ਕੇ ke sang nasht hov tri raj lakh kiyo praad kaw daan log mood aise kahe sa keh na bhed pachan eh sri charitra bakhiane kriya charitre bhup mantri samvaade 208